ਸੁਖਮਨੀ ਸੁਖ ਅਮਰ ਕ੍ਰਿਪ ਪ੍ਰਭ ਨਾਮ ਭਗਤ ਜਿਨਾ ਕੇ ਮਨ ਵਿਚਿ ਸ਼ਰਾਮ ਸੁਖਮਨੀ ਜਿਹੜਾ ਹੈਗਾ ਮਨ ਦੇ ਵਿਚ ਸੁਖ ਪੈਦਾ ਕਰਨ ਵਾਲੀ ਜੀ ਚੀਜ਼ ਹੈ ਬੜੀ ਦਾ ਅੰਦਰ ਮਨਾਂ ਵਿਚ ਸੁਖ ਪੈਦਾ ਕਰਦਾ ਸੁਖਮਨੀ ਸੁਖ ਉਹ ਜਿਹੜਾ ਅਮਰ ਕ੍ਰਿਪ ਪ੍ਰਭ ਕਹਰਾਏ ਜਿਹੜਾ ਲੱਗਿਆ ਬਹੁ ਬਚਨ ਲਗਾ ਕੇ ਮਨ ਅੰਦਰ ਕਰਕੇ ਲਿਜਾ ਸੁਖਮਨੀ ਸੁਣਾਣੇ ਸੁਖ ਸੁਪਨਾ ਦੇ ਵਿਚ ਸੁਖ ਜਿਹੜਾ ਹੈਗਾ ਸੁਖਮਨੀ ਸੁਖ ਅਮਰ ਕ੍ਰਿਪ ਉਬਰਤ ਪ੍ਰਭੂ ਲੋ। ਭਗਤ ਜੀ ਅੱਗੇ ਬੰਦਿਸ਼ਾ। ਉਹ ਸਾਰਿਆਂ ਦੇ ਅੰਦਰ ਉਬਰਤ ਹੈਗਾ। ਕਿਸੇ ਦੇ ਦਰੋਂ ਪਾਲਿਆ ਕਿਸੇ ਨੇ ਕਰੋ ਪਾਲਿਆ। ਸਾਰਿਆਂ ਦੇ ਕੋਲ ਪਾਣੀ ਹੈ। ਸਮਝਿਆ? ਕੋਈ ਪਾਣੀ ਨਾਲ ਕਿੱਥੋਂ ਲਿਆ ਆਇਆ ਕਿਸੇ ਦੇ ਪਾਣੀ ਆਇਆ ਹੈ। ਫਿਰ ਜਦ ਵਿੱਚ ਪੇਪਰ ਜਦ ਜਦ ਆ ਰਿਹਾ ਹੈ ਕੋਈ ਆ ਕੇ ਜਿੰਦਾ ਚਲਾ ਰਿਹਾ ਸਾਬੀ ਉਹ ਪਾਣੀ ਹੈਗਾ ਪਰ ਉਹ ਉਪਰੋਜ ਉਪਰ ਹੈ ਵੀ ਨਹੀਂ ਪਿਆਸ ਨਹੀਂ ਜਦੋਂ ਇਹ ਪਾਣੀ ਲੱਭ ਜਾਣ ਸੌਜੀ ਪਾਣੀ ਨਹੀਂ ਹੈ ਹਮੇਸ਼ਾ ਹੈਗਾ ਪਰ ਜੇ ਨੂੰ ਪਤਾ ਹੀ ਨਹੀਂ ਪਾਣੀ ਹੈ ਕਦ ਨਹੀਂ ਹੈ ਫਿਰ ਮੈਂ ਤਾਂ ਕਹਿੰਦਾ ਰੋਸੇ ਤਾਂ ਬਾਟ ਹੋਦਾ 3 ਪੁਆਇੰਟਸ ਤੋ ਲੋਭ ਨਾਮ ਨੂੰ ਬੜਾ ਟੋੜਨੇ ਸਿੱਖੇ ਕਿਦਾਂ ਦੱਸਿਆ ਕਿ ਅੰਦਰੋਂ ਹੋਣਾ। ਅੰ ਲੋੜ ਸਾਰਿਆਂ ਦੀ ਐ। ਲੋੜ ਸਾਰਿਆਂ ਦੀ। ਬਜਾਏ ਇਹ ਕਿ ਦੱਸਦੇ ਤੇਰੇ ਅੰਦਰ ਅੰਦਰੋਂ ਮਿਲਣਾ ਹੋ। ਬਾਹਰੋਂ ਸਾਫ਼ ਦੱਸ। ਵਿਚਾਰੇ ਬਾਹਰੋਂ। ਸਾਰਾ ਬਲ ਤਾਂ ਬਲ ਟੋੜਨਾ ਪੁੱਜੇ। ਸੌਖਾ ਕੰਮ ਜੀਕੋ। ਬਲੋ ਕਮਲਾ ਤੇ ਖੜਾ ਜਾਲੇ। ਤਾਂ ਤਦ ਸਾਡੇ ਤੜੀ खान गए अपने ਹੈ है कोई ਇਹ ਆ ਚਾਹੁੰਦੇ ਸੀ ਜਦੋਂ ਜਦੋਂ ਵੀ ਚਾਹੁੰਦੇ ਰਹੇ ਲੋਕ ਇਹ ਜਿਹਦੇ ਕੋਲ ਗਿਆਨ ਹਸ ਕਦੇ ਵੀ ਗਿਆਨ ਚੇਤੇ ਰਹੇ ਜੀ ਇਹ ਸੰਤ ਤੋਂ ਗੱਲ ਆ ਜਾਂਦਾਂ ਨੂੰਣੇ ਦੇ ਸੀ ਹੈ ਕਰਦੇ ਹੈ ਦੀ ਕੋਲ ਨੂੰ ਉਸ ਚਾਹਤ ਕੀ ਜਲਣਗੇ ਜੇ ਜਾਣ ਹਜ਼ਾਰੇ ਸੁਣ ਰਹੇ ਤੁਸੀਂ ਉਸਕੀਨ ਵੀ ਲੋਕਾਂ ਨੇ ਸੁਣਾ ਲੋਕ ਅੱਖ ਗੇਟੇ ਮਸਕੀਨ ਤੁਸੀਂ ਸੁਣ ਕੇ ਸਰੀਰ ਰੋਹੀ ਗਲ ਗਰੀ ਜਨ ਮੋਹਦਾ ਨਾ ਤੇ ਮਾਮੀ ਜੀ ਸੁਣੀ ਦੂ ਅੱਜ ਫੇਰ ਉਹੀ ਹੈ ਜਿਹੜੀ ਪਹਿਲਾਂ ਸੁਣੀ ਸੀ ਖੜਾ ਗਿਆ ਛਪੜੀ ਸੀ ਉਹਨੂੰ ਕਾਪੜ ਛਪੜੀ ਵਾਲਾ ਗਿਆ ਨਾ ਧਕਲਰ ਦੇ ਦੀ ਛਪੜੀ ਉਸ ਨਾਲ ਗਿਆਨ ਨੂੰ ਮੁਕਮਨੀ ਸੁਖ ਤਾਂ ਸੁਖਮਨੀ ਸੁਖ ਆਪਣਾ ਸੁਖ ਪਰਮਨਾਮ ਹੁੰਦਾ ਸੁਖਮਨੀ ਸੁਖ ਅਮਰ ਤੋਂ ਪੈਦਾ ਹੋਗਾ ਜੇ ਰਾਮ ਅਮਰ ਤੋਂ ਹੋਵੇ ਕਦੇ ਵੀ ਜੋ ਨਾਮ ਗਿਆਨ ਸੱਚ ਝੂਠਾ ਨਹੀਂ ਸਾਬਤ ਹੋਇਆ ਉਹ ਦੌਰ ਬ੍ਰਿਸ਼ਾ ਹੋਇਆ ਉਹ ਚਲਾ ਕੇ ਮਨੁਸ਼ਰਾ ਪਖਤ ਜਣਾ ਦੇ ਮੰਦੂ ਕੋਲ ਨਾ ਬਿਸਰਾਮ ਹੋਵੇ ਕੋਲ ਨਾ ਟਿਕਦੇ ਬਿਸਰਾਮ ਬਿਸਰਾਮ ਤੇ ਸੌਂਖਾ ਬਿਸਰਾਮੇ ਸੌਖਾ ਸਜ ਬਿਸਰਾਮੇ ਸੌਖਾ ਤੇ ਵਿਸਰਾਮੇ ਸੌਖਾ ਤੇ ਬੈਠਾ ਮੇਰਾ ਤਾਂ ਆਉਣ ਦੇ ਛੁੱਟੇ ਹੋ ਕਰ ਬੈਠੋ ਬਿਸਰਾਮ ਹਾਂ ਇੱਕ ਆਰਾਮ ਇੱਕ ਬਿਸਰਾਮ ਆਰਾਮ ਹੁੰਦਾ ਹੈ ਚੱਲ ਪੈਣ ਥੋੜੀ ਦੇਰ ਬਾਅਦ ਚਲ ਜਾਣਾ ਬਿਸਰਾਮ ਹੁੰਦਾ ਹਰ ਤੁਰਨਾ ਨਹੀਂ ਤੇਰੇ ਕੋਲ ਤੇਰੇ ਉਹਦੇ ਦੇ ਸਾਮ ਤੋਂ ਜਿਆਦਾ ਨੂੰ ਉਹ ਵੀ ਸਾਮ 2 ਲੱਖ ਦੇਣਾ ਨਾ ਪੱਕੀ ਬੰਦ ਹੋ ਜਾਂਦੀ ਹੈ ਫਿਰ ਪਰ ਰਹਾਉ ਤੇ ਰਹਾਉ ਚਲੇ ਕੇ ਰਹਾਉ ਇੱਥੇ ਆਗੇ ਰੋਲ ਗਿਆ ਉੱਪਰ ਗੱਲ ਕਰਕੇ ਕੁਝ ਨਹੀਂ ਆਮਤ ਮੈਨੂੰ ਕਈ ਸ਼ਬਦਾਂ ਚ ਵੀ ਆਇਆ ਵੀ ਦੋ ਬੰਦਿਆਂ ਉੱਪਰ ਆ ਕੇ ਫਿਰ ਰਹਾਉ ਲੱਗ ਜਾਂਦਾ ਈ ਵਾਰੀ ਕਈ ਵਾਰੀ ਗੱਲ ਕਿਸੇ ਟੌਪ ਦੀ ਗੱਲ ਕਰਕੇ ਫਿਰ ਰਹਾਉ ਲਾਉਂਦੇ ਨੇ ਅਸਲ ਤੇ ਵਿੱਚ ਉਹਨਾਂ ਨੇ ਪਹਿਲਾਂ ਸਦਗੋਦ ਦੀ ਗੱਲ ਕੀਤੀ ਪਹਿਲਾਂ ਨਮਸਕਾਰ ਦੀ ਗੱਲ ਕੀਤੀ ਮੰਗਲਾਚਰ ਉਹਦਾ ਮੰਗਲਾਚਰ ਮੈਂ ਇੱਕ ਤਰ੍ਹਾਂ ਦਾ ਹੁੰਦਾ ਮੰਗਲਾਚਰ ਹੂੰ ਠੀਕ ਹੈ ਉਹਦੇ ਬਾਅਦ ਉਹਨਾਂ ਨੇ ਕੁਝ ਸਿਵਣ ਦੀ ਗੱਲ ਕੀਤੀ ਸਿਵਣ ਸੁਰਨ ਤੋਂ ਪਾਉ ਹੈ ਸਿਵਣ ਕਿ ਨੂੰ ਕਿਹਾ ਜਾਂਦਾ ਦੀ ਡੈਕਲੇਸ਼ਨ ਦਿੱਤੀ ਹੂੰ ਕੀ ਦਾ ਕਰਨਾ ਵੀ ਦੱਸਿਆ ਜਾ ਇਹਦਾ ਕਰਨਾ ਉਹ ਵੀ ਦੱਸਿਆ ਅੱਗੇ ਫਿਰ ਉਹ ਸਿਵਣ ਵਾਲਾ ਕੀ ਹੋਇਆ ਸਿਵਲ ਕਾਲੇ ਵਾਸਤੇ ਕਰਨਾ ਸੀ ਸਿਵਨ ਨਹੀਂ ਸੀ ਪਤਾ ਕਿਸੇ ਨੂੰ ਵੀ ਅੰਦਰ ਭਗ ਜਨਾਂ ਦਾ ਦਸਰਾਮ ਕਿਵੇਂ ਹੋਇਆ ਭਗ ਦੇ ਆਂਹੀਆਂ ਜਿਹੜੀਆਂ ਕਹਾਣੀਆਂ ਸੁਣੀਆਂ ਪੜ੍ਹ ਕੇ ਦੇਖੋ ਕਿੰਦੇ ਕਿਉਂ ਇਹ ਭਗਤੀ ਲਿਖੀ ਹੈ ਤਰੋ ਰੋ ਕਦੇ ਵੀ ਇਹ ਗੱਲ ਨਹੀਂ ਕਹੀ ਹੋਈ ਉਹਦਾ ਕੋਈ ਦਸਰਾਮ ਰੂਦਾ ਕਲਤ ਭਾਰ ਹੋ ਕਰ ਪਕਤੀ ਕਰਦਾ ਹੈ ਸਾਡੇ ਉਹ ਕਰਦਾ ਦਿਖਾਇਆ ਤੇ ਵਿਸ਼ਰੂਦਾ ਦਾ ਡੋਲ ਗਿਆ ਸਾਰ ਉਹਨਾਂ ਨੇ ਕਹਿਆ ਕਿ ਸਾਰਾ ਹੋ ਐਕਸੀਡੈਂਟ ਹੋ ਜਾਊਗਾ ਸਭ ਬਲੱਟ ਹੋ ਜਾਊਗਾ ਫਰਦੂਗਾ ਹੈ ਵਿਸ਼ਰੂ ਨੂੰ ਮਜਬੂਰ ਕੀਤਾ ਮੇਰੀ ਭਗਤੀ ਕਰ ਤੂੰ ਵੀ ਰੱਬ ਦੇ ਵਾਸਤੇ ਉਹ ਆਪ ਅਪੀਲ ਕਰ ਤੂੰ ਉਹ ਜੋ ਕੋ ਬੁਗਣਾ ਉਹ ਤਾਂ ਇਹ ਕਹਿ ਨੇ